ਸੇ ਲੋਕ ਮਹੱਲਾ ਦੂਜਾ ਆਪ ਉਪਾਇ ਨਾਨਕਾ ਆਪੇ ਰੱਖੇ ਵੇਕ ਮੰਦਾ ਕਿਸ ਨੂੰ ਜਾਂ ਸਭਨਾ ਸਾਹਿਬ ਏਕ ਆਪਣੇ ਰੂਪ ਨੂੰ ਆਪੇ ਪੈਦਾ ਕਰਦਾ ਆਪਣੇ ਅੰਦਰ ਇੱਛਾ ਆਪੇ ਪੈਦਾ ਕਰਦਾ ਆਪ ਉਪਾਇ ਨਾਨਕਾ ਆਪੇ ਰੱਖੇ ਵੇਕ ਉਹਦੇ ਵੱਲ ਧਿਆਨ ਵੀ ਰੱਖਦਾ ਹੈ ਅੱਛਾ ਵੱਲ ਪਰਮੇਸ਼ਰ ਸ੍ਰਿਸ਼ਟੀ ਪੈਦਾ ਕਰਦਾ ਹੈ ਉਹ ਸ੍ਰਿਸ਼ਟੀ ਦਾ ਧਿਆਨ ਪੈਦਾ ਕਰਦਾ ਧਿਆਨ ਨਹੀਂ ਕਰਦਾ ਸੁਣਤਾ ਨੂੰ ਅੱਖਿਆ ਦਾ ਸਬਦਨ ਸਾਹਿਬ ਹੈ ਸਬਦਨ ਸਾਹਿਬੇ ਦਾ ਬੁੱਧਾ ਕਿਹ ਨੂੰ ਕੋਈ ਵੀ ਨਹੀਂ ਕਿਸੇ ਦੇ ਅੰਦਰ ਸਾਹਿਬ ਇੱਛਾ ਇਹ ਜੀ ਪੈਦਾ ਹੁੰਦੀ ਹੈ ਕਹੇਗੀ ਜੀ ਜੀ ਪੈਦਾ ਹੁੰਦੀ ਸਾਬ ਜੀ ਰਸਾਲਾ ਦੀ ਇੱਛਾ ਪੈਦਾ ਹੁੰਦੀ ਹੈ ਤੇ ਬੁੱਧਾ ਅਚੰਭਾ ਹੋਈ ਦੀ ਕਿਉਂਕਿ ਸਾਬ ਦੀ ਇੱਛਾ ਹੈ ਸੋ ਇੱਛਾ ਸਾਬ ਦਾ ਹੀ ਮਨ ਹੈ ਇਹ ਬੁੱਧਾ ਬੋਲੇ ਕਾਹੀ ਸਾਬ ਦਾ ਹੈ ਜਾਂ ਕਿਤਾਬ ਉਹਦੇ ਕਾਹੀ ਸਾਬ ਇਸ ਕਰਕੇ ਬੁੱਧੇ ਨੂੰ ਬੁੱਧਾ ਵੀ ਕਿਹਾ ਜਾ ਸਕਦਾ ਸਾਬ ਦਾ ਮਨ ਸਭਰਾ ਸਾਬ ਹੈ ਸਭਰਾ ਮਨਾ ਦਾ ਹੀ ਕੋਈ ਹੈ ਰਾਖਨੂ ਸਬਦ ਦਾ ਸਾਹਿਬ ਹੈ ਆਪਣਾ ਗੂੜ ਤੋਂ ਹੀ ਫਾਇਦਾ ਹੋਇਆ ਹੈ ਕੋਈ ਪਾਣੀ ਤੋਂ ਪੈਦਾ ਹੋਈ ਹੋਈ ਲਹਿਰ ਕਿਹੜੀ ਲਹਿਰ ਤੋਂ ਚੱਜੀ ਗਈ ਹੈ ਕਿਹੜੀ ਲਹਿਰ ਤੋਂ ਮਾੜੀ ਗਈ ਹੈ ਜਦ ਗੂੜ ਇੱਕਾ ਸੰਗ ਹਾਂਜੀ ਸਬਨਾ ਸਾਹਿਬ ਏਕ ਹੈ ਵੇਖੇ ਤੰਦ ਲਾਈ ਕਿਸੇ ਥੋੜਾ ਕਿਸੇ ਅਗਲਾ ਖਾਲੀ ਕੋਈ ਨਹੀਂ ਹਾਂ ਸਬਨਾ ਸਾਹਿਬ ਏਕ ਹੈ ਸਬਨਾ ਦਾ ਸਾਹਿਬ ਤਾਂ ਏਕ ਹੈ ਵੇਖੇ ਤੰਦ ਲਾਏ ਤੰਦ ਲਾ ਕੇ ਪੁੱਠੇ ਆ ਸਿੱਧੇ ਦੋਇ ਲੱਗੇ। ਦੰਦੇ ਕੋਈ ਧਰਮ ਦੇ ਤਰਤੇ ਲੱਗਿਆ ਹੋਇਆ, ਕੋਈ ਧਰਮ ਨਾਲੇ ਪਾਸੇ ਲੱਗਿਆ ਹੋਇਆ, ਕੋਈ ਤੰਦੇ ਵਾਲੇ ਪਾਸੇ ਲੱਗਿਆ। ਕੋਈ ਆਪਣੇ ਅਸੀਂ ਆਪਣਾ ਕੰਮ ਸਵਾਲ ਲੱਗਿਆ ਹੋਇਆ, ਕੋਈ ਪੈਰ ਕੋਹਾੜਾ ਬਣ ਲੱਗਿਆ। ਕਿਸੇ ਥੋੜਾ ਕਿਸੇ ਅਗਲਾ ਖਾਲੀ ਕੋਈ ਨਹੀਂ। ਕਿਸੇ ਨੂੰ ਤਾਂ ਧੋਲਾ ਮਿਲਦਾ ਗਿਆਨ, ਕਿਸੇ ਨੂੰ ਬਾਹ ਤੇ ਗਾਂ ਮੜੀ ਜਾਂਦਾ। ਦਿਲਦਾ ਜਰੂਰ ਨੂੰ ਗਲਤੀ ਚੋਂ ਗਿਆਨ ਮਿਲਦਾ ਕਿਸੇ ਨੂੰ ਸ਼ਬਦ ਵਿਚਾਰ ਚੋ ਗਿਆ ਨਦ ਕਿਸੇ ਨੂੰ ਖੋਜ ਵਿੱਚੋਂ ਕੁਝ ਲੱਭਦਾ ਕਿਸੇ ਨੂੰ ਨੁਕਸਾਨ ਕਰੇ ਤੋਂ ਫਿਰ ਉਹ ਵਿਚਾਰੇ ਕਰਨ ਲੱਗਦਾ ਕੰਮ ਬਗਾੜ ਲੈਂਦਾ ਪਛਤਾਉਂਦਾ ਪਰ ਗਿਆਨ ਮੁੱਠੋਂ ਵੀ ਮਿਲਦਾ ਥੋੜਾ ਮਿਲਦਾ भी ਜੇ ਪੁੱਠੇ ਪਾਸੇ ਲੱਗੇ ਤੇ ਉਹਨਾਂ ਨੂੰ ਵੀ ਗਿਆਨ ਨਹੀਂ ਮਿਲਦਾ ਹਾਂਜੀ ਆਵੇਂ ਨੰਗੇ ਜਾਹੀਂ ਨੰਗੇ ਅੱਗੇ ਕਾਈਕਾਰ ਆਵੇਂ ਉਤੇ ਜੇ ਜੀਵ ਉਹਨੇ ਤਾਂ ਇਹਨਾਂ ਦਾ ਸਰੀਰ ਮਾਇਆ ਦਾ ਕੱਪੜਾ ਹੋਈ ਨਹੀਂ ਪੈਂਦੇ ਹੁੰਦਾ ਜਿਹੜਾ ਕਾਰੀ ਸਰੀਰ ਉਹਨੇ ਜਦੋਂ ਆਵੇਂ ਉਤੇ ਚਾਹੇ ਵੀ ਤੁਸੀਂ ਜਾਣਦੇ ਨੇ ਜੀਵਨ ਦੇ ਤੌਰ ਤੇ ਬਹੁਤ ਵਿਸਾਰ ਕਰ ਲੈਣ ਦੇ ਦਸਤਾਰ ਬਣਾ ਲੈਣ ਦੇ ਦੋਸਤ ਬਿੱਤਰ ਬਣਾ ਲੈਣ ਦੇ ਜਿਹੜਾ ਬਣਾ ਲੈਣ ਦੇ ਬਹੁਤ ਕੁਝ ਅਡੱਬਰ ਰਚ ਲੈਣ ਦੇ बड़े-बड़े यो घरतीयो बना लेते ने बड़े-बड़े ग्रुप बना लेते ने ए विस्तार पे चले विस्तार ही करते ने जीवन जीवन ने टाइम की विस्तार करते जीवन, जीवन, खाथ जीवन कर ही ने टाइम की विस्तार आ जाण लगे फेख हट खादी तुग्गे औंदे भी रुक गई तु फिर ਨਾਨਕ ਜੀ ਨੇ ਉਹ ਕੋਕ ਪਹਿਲੇ ਜੀਨੂ ਨੇ ਹਕਮ ਦੀ ਜਾਂਦੇ ਹੋ ਉਹਨਾਂ ਨੇ ਅੱਗੇ ਵਾਸਤੇ ਕਿਹੜੀ ਕਾਰ ਕਰਨੀ ਜੀ ਵਾਸਤੇ ਸਰਗੋਸ਼ ਕਮੂਣ ਵਾਲੀ ਕਾਰ ਬਿਸਾਰ ਦਾ ਕਾਲੇ ਸਤਸਾਲ ਵੀ ਬਹੁਤ ਤਰੱਕੀ ਦਾ ਕਾਲੀ ਸਤਸਾਲ ਵੀ ਬਹੁਤ ਹੈ ਸੰਪਦਾਰ ਦਾ ਇਕੱਠੇ ਕਾਲੇ ਸਤਸਾਲ ਵੀ ਬਹੁਤ ਪਰ ਉਹ ਕਾਰ ਵੀ ਕੀਤੀ ਜਿਹੜੀ ਅੱਗੇ ਕਬੂਲ ਹੋਈ ਸੀ ਅੱਗੇ ਕਾਈ ਕਾਰ ਉਹ ਕਾਰ ਹੈ ਜਿਹੜੀ ਅੱਗੇ ਵਾਸਤੇ ਕਰਦੀ ਜੇ ਨਾ ਜਿਹੜਾ ਹੁਕਮ ਨਹੀਂ ਪੂਜਿਆ ਜਿਹਨੂੰ ਉਹਨੂੰ ਲੋੜੀ ਸਮਝਾਈਏ ਅੱਜ ਉਹ ਹੋਰੇ ਕੁਝ ਕਰਦੇ ਰਹੇ ਹਾਂਜੀ ਮਹੱਲਾ ਪਹਿਲਾ ਜਿੰਸ ਥਾਪ ਜੀਆਂ ਕੋ ਭੇਜੈ ਜਿੰਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਇੱਤੇ ਵੇਸ਼ ਕਰਾਵੇ ਜਿੰਸੀ ਥਾਪ ਜੀ ਉਹ ਲੈ ਜਾਵੇ ਜਿਸ ਦੇ ਵਿੱਚ ਥਾਪ ਰਦ ਜਿੰਸੰਧੀ ਹੈ ਜੇ ਬੀਜ ਹੁੰਦਾ ਤਾਪ ਦੇ ਅੰਦਰ ਬੀਜ ਦੇ ਵਿੱਚ ਬੀਜ ਵਿੱਚ ਜੀਵ ਰੂਹ ਘਲ ਦਿੰਦਾ ਸਰਸਾਰ ਚ ਫਿਰ ਉਹ ਜੰਮਿਆ ਹੁੰਦਾ ਰੂਪ ਬਣਦਾ ਹੁੰਦਾ ਜਨਮ ਲੈਣ ਦਾ ਇਹ ਤੋਂ ਕਢਦੀ ਸਾਰੇ ਕਿਸੇ ਜੀਨਸ ਵਿੱਚ ਪਾ ਦਿੰਦਾ ਜਿਹੜਾ ਤਾਪ ਇਹ ਬਹੁਤ ਇੰਪੋਰਟੈਂਟ ਸ਼ਬਦ ਹੈ ਜਦੋਂ ਬੜੇ ਵੀ ਪਹਿਲਾਂ ਜਿੰਨ ਸਾਬ ਵਿਚਾਲੇ ਟਾਈਮ ਕੋਈ ਨਹੀਂ ਜਿਹੜੇ ਕਹਿੰਦੇ ਨੇ ਭੂਤ ਆਏ ਉਹ ਵਿਚਾਲੇ ਦੇ ਟਾਈਮ ਹੈ ਜਿੰਸ ਜਿੰਸ ਤੋਂ ਕੱਢਿਆ ਜਿੰਸ ਵਿੱਚ ਪਾਤਾ ਚਾਹੇ ਜਦੋਂ ਕਾਸੂਰ ਦੇ ਬੀਜ ਦੇ ਕਿਸੇ ਵਿੱਚ ਵੀ ਪਾ ਦੇ ਐਨੀ ਕੰਕੂ ਗਦੀਆਂ ਕੰਕ ਦੇ ਬੀਜ ਦੀ ਚਾਹੀਦੇ ਡਾਲ ਦੀ ਚਾਹੀਦੇ ਵਸਲੀ ਦੀ ਡਾਲੇ ਦੀ ਉਹਨਾਂ ਜੀ ਦੀ ਚਾਹੀਦੇ ਜੀ ਚਾਹੀਦੇ ਵੀ ਬਹੁਤ ਨੇ ਜਿੱਤੇ ਵਰਦੇ ਨੇ ਉਹ ਚਾਹੀਦੇ ਵੀ ਜਿੰਸੀ ਥਾਪ ਲੈ ਜਾਵੇ ਲੈ ਜਾਵੇ ਲਜਾਣ ਦਾ ਤਰੀਕਾ ਵੀ ਜਿੰਸ ਦੇ ਥਾਪ ਕੇ ਹੈ ਐਦਾਂ ਕੱਢ ਲੈਂਦਾ ਉਧਰ ਪਾ ਦਿੰਦਾ ਮੋਕੋ ਬਦਲ ਜਤੀ ਜੇ ਜੀ ਆਉਂਦੇ ਨੇ ਉਹ ਵੀ ਜਨਸ ਦੇ ਵਿੱਚ ਹੀ ਆਉਂਦੇ ਨੇ ਇੱਕ ਹੁੰਦਾ ਬੀਜ ਜਿਵੇਂ ਕੰਨ ਦੇ ਕਿ ਜਣਸ ਹੈ ਸਰਵ ਜਣਸ ਹੈ ਆਦਮੀ ਦਾ ਵੀਰਜ ਵੀ ਜਣਸ ਹੈ ਉਹ ਵੀ ਬੀਜ ਕਹਿੰਦੇ ਨੇ ਉਹ ਜਨਸ ਹੈ ਵਸਤੂ ਹੈ ਜੜੀ ਮਾਇਆ ਦੀ ਤਾਂ ਜੀ ਪੈਦਾ ਹੁੰਦੀ ਸਾਰੇ ਜੀ ਆਪਣੇ ਗੁਰ ਤੋਂ ਜਣਸ ਵਿੱਚ ਪ੍ਰਵੇਸ਼ ਕਰਦਾ ਆ ਵੀ ਇਹ ਜਲ ਵਿੱਚ ਤੇਰਾ বাস ਹੈ ਕਬੀਆ ਜਦ ਅੱਡ ਹੁੰਦਾ ਆਪਣੇ ਮੂਲ ਤੋਂ ਜਦੇ ਜਨਸ ਵਿੱਚ ਪ੍ਰਵੇਸ਼ ਕਰਦਾ ਹੈ ਦਾ ਪ੍ਰਵੇਸ਼ ਜਲ ਵਿੱਚ ਹੈ ਹਾਂਜੀ ਆਪੇ ਥਾਪ ਉਥਾਪੇ ਆਪੇ ਇੱਥੇ ਵੇਸ਼ ਕਰਾਵੇ ਆਪੇ ਥਾਪ ਆਪੇ ਦਾ ਥਾਪ ਦਾ ਉਹਦੇ ਵਿੱਚ ਜਨਸ ਤੇ ਜੋੜਦਾ ਹੈ ਵੀ ਇੱਥੇ ਟਿਕ ਜਾਂਦਾ ਜਨਸ ਵਿੱਚ ਆਪ ਉਥਾਪੇ ਆਪੇ ਥਾਪ ਉਥਾਪੇ ਆਪੇ ਜਦੋਂ ਉਹਨੂੰ ਤੋੜਦਾ ਹੈ ਪਾਇਆ ਨਾਲੋਂ फेर ਵੀ ਆਪੇ ਹੁਕਮ ਨਾਲੇ ਤੋੜਦਾ ਹੁਕਮ ਨਾਲੇ ਜੋੜਦਾ ਹੁਕਮ ਨਾਲੇ ਤੋੜਦਾ ਜਿਸ ਤੋਂ ਟੋੜਦਾ ਦੂਏ ਨਾਲ ਜਿਸ ਨਾਲ ਜੋੜਦਾ ਹੁਕਮ ਨਾਲੇ ਇੱਟੇ ਵੇਸ ਕਰਾਵੇ ਇਸ ਤਰੀਕੇ ਨਾਲ ਵੇਸ ਉਹਦੇ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀ ਜਿੰਸ ਹੋ ਜਾਂਦੀ ਹੈ ਕਹੇ ਜੀ ਜਿੰਸ ਹੋ ਜਾਂਦਾ ਰੰਗੀ ਰੰਗੀ ਭਾਂਤੀ ਉਸ ਤਰ੍ਹਾਂ ਦੀ ਗੱਲ ਹੈ ਜੀ ਹਾਂ ਜੀ ਹਾਂ ਜੀ ਜੀਤੇ ਉਹ ਧੂਤੀ ਆਪੇ ਪਿਖਿਆ ਪਾਵੈ ਲਿਖੈ ਬੋਲਣ ਲਿਖੈ ਚੱਲਣ ਕਾਇਤ ਕੀਚੇਂ ਦਾਵੀ ਜਿੱਤੇ ਜੀ ਫਿਰੇ ਨਾਲ ਤੂਤੀ ਜਿੰਨੇ ਵੀ ਜੀਵ ਤੁਰੇ ਫਿਰਦੇ ਨੇ ਦੇ ਹੀ ਕਿਸੇ ਤੋਂ ਕੁਝ ਚੁੱਪ ਨੇ ਆਪੇ ਨੂੰ ਵੀ ਖਾਣ ਨੂੰ ਦਿੰਦਾ ਨੂੰ ਚਿੰਤਾ ਕੋਈ ਨਹੀਂ ਤੁਰੇ ਫਿਰਦੇ ਨੇ ਪੂਰੇ ਕੁਝਾਂ ਕੁਝ ਆ ਜਾਂਦਾ ਖਾ ਲੈਦੇ ਔਰ ਤੂਤੀ ਦੇ ਉਹਨਾਂ ਦੇ ਅੰਦਰ ਇੱਛਾ ਕੋਈ ਨਹੀਂ ਹੈ ਉਹਨਾਂ ਨੂੰ ਹੀ ਦਈ ਜਾਂਦਾ ਲਿਖ ਬੋਲਣ ਲੇਖਾ ਚਲੜੂਾਇਤ ਕੀਚੇ ਦਾਵੇ ਆ ਜਿਹੜਾ ਬੋਲਣਾ ਚਲਣਾ ਇਹ ਲੇਖਾ ਹੈ ਲੇਖਾ ਲਿਖਿਆ ਜਾਣਾ ਇਹੀ ਪੁੱਤ ਪਾਪ ਹੈ ਬੋਲਣ ਚਲਣ ਦਾ ਅੱਜ ਕੱਲ੍ਹ ਨੂੰ ਕਰਨਾ ਮੈਂ ਇਹ ਜੀ ਕੀਤਾ ਉਹ ਠੁੱਟੀ ਵਾਲੇ ਜਿਹੜੇ ਨੇ ਉਹ ਲੇਖੇ ਤੇ ਪਰੇ ਉਹ ਦਾਵੇ ਨਹੀਂ ਜਾਂਦਾ ਦੇਈ ਤੈਨੂੰ ਵੀ ਜਾਂ ਪਰ ਬੋਲਣ ਵਾਲੇ ਜਿਹੜੇ ਦਾਵੇ ਦੇਣ ਇਹ ਲੇਖਾ ਲਿਖਿਆ ਗਿਆ ਤੇਰਾ ਤੈਨੂੰ ਦਾਵੇ ਕਰਦੀ ਕੀ ਲੋੜ ਹੈ ਬੋਲਣ ਦੀ ਕੀ ਲੋੜ ਹੈ ਜੇ ਨਾ ਬੋਲਦਾ ਤਾਂ ਵੀ ਬਣ ਜਾਣਾ ਨੂੰ ਵੀ ਗਾਲ ਪੇੜੂ ਦੀ ਲੋੜ ਨਹੀਂ ਹੈ ਮੈਨੂੰ ਬੋਲੇ ਸਭ ਕੁਝ ਆਂਦਾ ਠੀਕ ਹੈ ਤਾਂ ਨਹੀਂ ਲੈਂਦੇ ਲੋਕੀ ਜਿਹੜਾ ਲਿਖਾ ਉਹਨੇ ਲਿਖਿਆ ਉਹਦੇ ਚ ਕੋਈ ਬੋਲਦਾ ਔਰ ਚੱਲਦਾ ਨਹੀਂ ਨਹੀਂ ਨਹੀਂ ਉਹਦਾ ਬੋਲ ਹੈ ਉਹ ਤਾਂ ਸੁਣਦਾ ਬੋਲ ਅਬੋਲ ਮਦ ਹੈ ਸੋਏ ਉਹਦਾ ਬੋਲਣਾ ਨਾ ਬੋਲ ਰਹਾ 40 ਇਹ ਦੋ ਬੋਲਦਾ 20 ਹੈ ਬੋਲਦਾ 20 ਤੁਸੀਂ ਹਾਂ ਮਨੁਸਾਨ ਦੀ ਇਹ ਸੋਚੀ ਹੈ ਕਿ ਮੈਂ ਨਹੀਂ ਕਰ ਰਿਹਾ ਮੈਨੂੰ ਕਰਵਾਇਆ ਜਾ ਰਿਹਾ ਲਿਖੇ ਬੋਲਣ ਲਿਖੇ ਚੱਲਣ ਦੀ ਹਾਂਜੀ ਉਹ ਕਹਿੰਦਾ ਉਹ ਤੂਤੀ ਜਿਹੜੇ ਲਫਜ਼ ਵਰਤੇ ਰੂਪੇ ਨਾ ਉਹ ਤੂਤੀ ਉਹਦਾ ਅਸਰ ਉਸ ਵਰਤੇ ਜੀ ਫਿਰ ਉਹ ਤੂਤੀ ਜਿਹੜੇ ਬਗਦੇ ਨਹੀਂ ਕੁਝ ਵੀ ਉਹ ਤੂਤੀ ਦੇ ਚੁੱਪ ਰਹੇ ਕਣ ਕਦੇ ਦਾਣੇ ਦੇ ਬਹੁਤ ਆਣ ਦੇ ਦਾਣੇ ਦੇ ਉਹ ਤੂਤੀ ਦੇ ਰਿਹਾ ਇਹ ਇਨਸਾਨ ਨੂੰ ਛੱਡ ਕੇ ਸਾਰੇ ਉਹ ਤੂਤੀ ਐ ਕੋਈ ਜਾਨਵਰ ਜਿਹੜੇ ਮੰਗਦਾ ਕਿ ਮੈਂ ਆ ਖਾਣਾ ਐ ਆ ਪੀਣਾ ਜਾਨਵਰਾਂ ਦੇ ਅੰਦਰ ਕਲਪਣਾ ਪੈਦਾ ਹੁੰਦੀ ਐ ਉੜਦੇ ਜੇ ਨੂੰ ਉੱਡਣ ਵਾਲੇ ਦੀਵਾਂ ਦੇ ਵਿੱਚ ਕਲਪਣਾ ਜੋ ਮੋਟੀ ਪੈਦਾ ਹੁੰਦੀ ਐ ਸਿੱਖਣ ਬੋਲਣ ਜਿਵੇਂ ਮੁੱਢਨਾ ਨਾ ਬੋਲਣ ਬੁੱਗਣਾ ਲੈਕਾ ਚੱਲਣ ਜਿਹੜਾ ਚੱਲਣਾ ਵੀ ਉੱਥੇ ਚੱਲੀਏ ਜਿਹਨੂੰ ਇਹ ਕਹਿਣਾ ਵੀ ਯੂਪੀ ਜਿਹੜੇ ਹੁੰਦੇ ਹੁੰਦੇ ਕਿ ਚਮਾਸੇ ਚ ਉੱਥੇ ਆਪ ਹੁੰਦੇ ਨੇ ਸੰਤ ਕਹਿੰਦੇ ਤਾਂ ਉੱਥੇ ਚਲੇ ਜਾਂਦੇ ਇਹ ਸਭ ਲੇਖੇ ਦੀ ਲਾਨਾ ਹੈ ਇਹ ਕਾਲ ਪੀਣ ਦਾ ਅਸਲ ਭਗਤੀ ਵਾਲੀ ਕੋਈ ਗੱਲ ਨਹੀਂ ਜੀ ਜੇ ਦਾਵਾ ਦਾਵਾ ਭਗਤੀ ਦੇ ਦਾਵੇ ਫਿਰ ਕਾਲੇ ਕਰਦੇ ਹੁੰਦੇ ਕੁਝ ਹੋਰ ਅਰਦਾਸ ਦੇ ਵਿੱਚ ਫਿਰ ਭਗਤੀ ਕਾਦੀ ਰਹੀਗੀ ਉੱਥੇ ਭਗਤੀ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਜੇ ਵਿੱਚ ਬੋਲਦਾ ਆਪ ਬੋਲਣਾ ਨਹੀਂ ਸੁਣਨਾ ਹੈ ਸੁਣਨਾ ਸਮਝਣਾ ਭਗਤੀ ਹੈ ਵਿੱਚ ਬੋਲਣਾ ਜਦ ਬੋਲਦੂਗਾ ਟੋਲੂਗਾ ਫਿਰ ਭਗਤੀ ਕੱਟੀ ਗਈ ਬੋਲੂਗਾ ਚਾਚਾ ਸ਼ੰਕਾ ਹੋਊਗੀ ਬੋਲੂਗਾ ਚਾਚਾ ਬਰਾਬਰੀ ਕਰੂਗਾ ਠੀਕ ਹੈ ਜੀ ਇਹ ਸਿਰਫ ਇਨਸਾਨ ਕਰ ਫਰਮਾਇਸ਼ ਖਾਇਆ ਹੈ ਕੋਲ ਥੋੜੀ ਬਹੁਤ ਗੁੰਜਾਇਸ਼ ਬਾਕੀ ਬਾਕੀ ਗੱਲ ਹੈ ਹਾਂਜੀ ਉਹਨਾਂ ਨੂੰ ਜੋ ਮਿਲਦਾ ਉਹੀ ਖਾ ਲੈਂਦੇ ਆ ਆਓ ਜੀ ਠੀਕ ਹੈ ਜੀ ਪਰ ਇਹ ਹੈ ਕਿ ਸ਼ੇਰ ਨੇ ਕਾਹ ਨਹੀਂ ਖਾਣਾ ਤੇ ਜਿਹੜੇ ਕਾ ਖਾਂਦੇ ਆ ਜਾਨਵਰ ਉਹਨਾਂ ਨੇ ਮੀਸ ਮਾਸ ਨਹੀਂ ਖਾਣਾ ਇਹ ਹੁਕਮ ਉਹਨਾਂ ਦਾ ਅੰਦਰ ਲਿਖ ਕੇ ਪਾਇਆ ਉਹ ਚੱਲਦਾ ਫਤਰਾ ਆਦਵੀਨ ਯੂਤ ਜੇ ਐ ਪਿਛੇ ਜਾਣਦਾ ਫਿਰ ਫਤਰਾ ਵੀ ਹੈ ਢੀਕੇ ਸਦੂ ਠੀਕ ਹੈ ਜੀ ਹਾਂ ਉਹਨਾਂ ਨੇ ਤਾਂ ਪੌੜੀ ਚੜ੍ਹਨੀ ਠੀਕ ਹੈ ਜੀ ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਮੂਲ ਮਤ ਪਰਵਾਣਾ ਇਹੋ ਇਹ ਮੂਲ ਮਤਾ ਹੀ ਪ੍ਰਵਾਨ ਹੈ ਦਰਗਾਹ ਦੇ ਵਿੱਚ। ਖਾਨਕਾਖ ਸਮਾਏ ਨਾਨਕ ਜੀ ਦਾ ਤੁਹਾਨੂੰ ਪਾਈ ਦਸਤੀ ਬੁਲੇੜੇ ਇਹ ਬੋਲਣਾ ਬੁੱਢਣਾ ਜਿਹੜਾ ਹੈਗਾ ਇਹ ਲੇਖੇ ਜਾਊਗਾ। ਔਰ ਤੂਤੀ ਰਣਾ ਫਿਰ ਬੁੱਗੇ ਸਭ ਕੋ ਜਾਣਦਾ ਕਿ ਅਲੇਖੇ ਚ ਲੇਖਾ ਛੜ ਅਲੇਖੇ ਛੁਟਾ ਹੈ। ਛੁਟਕਾਰਾ ਅਲੇਖੇ ਦੇ ਵੀ ਛੁਟਕਾਰਾ ਹੈ ਲੇਖੇ ਦੇ ਵਿੱਚ। ਜੱਗੜ ਹੋਏ ਤਬਾਸ ਜੇ ਕੋ ਕਹੇ ਆਏ ਕਰਨੀ ਹੀ ਤਾਂ ਪਰ ਕਾਈ ਬੰ ਵਸ ਜਾ ਸਕਦਾ ਨੂੰ ਬਸ ਕਰਨਾ ਤਾਂ ਕਰਨੀ ਦਾ ਪੂਰਾ ਹੋਣਾ ਚਾਹੀਦਾ ਜੋ ਕਹਿੰਦਾ ਜੋ ਗੁਰਬਾਣੀ ਕਹਿੰਦੀ ਕਰੇ ਜੇ ਕੋ ਜੇ ਕੋ ਕਹਿੰਦਾ ਇਹ ਸੰਹੁ ਦਾ ਵੀ ਗੁਰਬਾਣੀ ਪੜਦਾ ਉਹ ਗੁਰਬਾਣੀ ਆਹ ਕਹਿੰਦੀ ਹੈ ਤਾਂ ਕਰੇ ਫਿਰੋ ਬਾਣੀ ਜੋ ਕਹਿੰਦੀ ਹੈ ਜੇ ਕੋ ਪੜਦਾ ਜਾਂ ਸੁਣਦਾ ਕਿਸੇ ਨੂੰ ਸੁਣਦਾ ਉਹ ਤੋਂ ਕਰੇ ਪੜੇ ਸੋਣ ਦੇ ਕਿਆ ਹੋਈ ਜਸਾ ਸਹਿਜ ਨੂੰ ਬਸ ਕਰੇ ਤੇ ਬੁਰਜ ਬਸ ਜਾਊਗਾ ਕਰੇ ਤੇ ਬੋਲ ਟਿਕੂਗਾ ਕਰੇ ਤੇ ਸ਼ਾਂਤੀ ਆਊਗੀ ਤੇ ਗੱਲਾਂ ਨਾਲ ਪੜੇ ਤੇ ਸ਼ਾਂਤੀ ਦੀ ਹੋਵੇ ਪੜੇ ਸੋਣ ਦੇ ਕਿਆ ਹੋਏ ਜਸਾ ਸਹਿਜ ਨੂੰ ਮਿਲਿਆ ਸੋ ਸਹਿਜ ਆਊਗਾ ਤੇ ਕੜਨੀ ਉੱਪਰ ਪੂਰਾ ਹੋ ਚੱਲੂ ਕਠੜੀਆਂ ਕਰੜੀ ਇੱਕ ਹੋ ਜੂ ਠੀਕ ਹੈ ਜੀ ਇਹਦਾ ਆਪਾਂ ਅਰਥ ਇਹ ਕੀਤਾ ਪਰ ਮੈਨੂੰ ਲੱਗਦਾ ਜਿਹੜੇ ਹੋਰ ਟੀਕਾਕਾਰ ਉਹਨਾਂ ਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਆਈ ਉਹ ਸੋਚਦੇ ਹਨ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੇ ਕਹਾਏ ਇਹਦੇ ਅਰਥ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਕੀਤੇ ਆ ਜੀ ਭਾਵੇਂ ਹੋਰ ਜੋ ਕੁਝ ਵੀ ਕੋਈ ਆਖੇ ਤੇ ਆਖੇ ਅਸਲ ਗੱਲ ਇਹ ਹੈ ਕਿ ਹਰੇਕ ਦੇ ਆਪਣੇ ਕੀਤੇ ਕਰਮ ਅਨੁਸਾਰ ਇਹਨਾਂ ਜਾਣਤਾ ਕੇ ਬਸ ਕੁਛ ਨਹੀਂ ਜਿਹੜੀ ਗੁਰਬਾਨੀ ਕਹਿੰਦੀ ਉਹ ਤਾਂ ਉਹ ਵੀ ਤਾਂ ਸੁੜੀਆਂ ਦੀ ਗੱਲ ਆਲਸ ਦੇ। ਦਿਆ ਕਰ ਜਿੱਥੇ ਗਈ ਫਿਰ ਤਪਾਵਸ ਦਾ ਅਰਥ ਉਹ ਕਰਦੇ ਆ ਜੀ ਇਸ ਸ਼ਬਦ ਵਿੱਚ ਨਵੇੜਾ। ਜਿਆ ਕਹਿਣ ਹੋ ਤਪਾ ਬਸ। ਤਪਾ ਜਿਹੜਾ ਨੂੰ ਬਸ ਕਰਦੇ ਬੋਣ ਬਸ ਕਰਦੇ। ਮਾਨਵਾ ਸਾਹਿਬੇ ਦੋੜ ਕੇ ਕੋਣ ਕਿਰਪਾ ਹੋਏ। ਤਪਾਵਸ ਕਿਵੇਂ ਕਰ ਲਿਆ ਨੇ? ਕਿਹੜੇ ਸੂਰਨਾਂ ਨੇ ਅਰਥ ਆ ਗਿਆ। तपावस ਤੇ ਹਰੇਕ ਜਗ੍ਹਾ ਨਿਵਾਅ अर्थे ਕਰਦੇ ਆ ਜੀ। ਜੀ ਤਪਾਵਸ ਦਾ ਨਿਆ ਅਰਥ ਉਦਾਈ ਦੀ ਤਪਾਵਸ ਠੀਕ ਹੈ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਇਹਦੇ ਅਰਥ ਵੀ ਉਹ ਇਸ ਤਰ੍ਹਾਂ ਹੀ ਕਰਦੇ ਆ। ਸੱਚ ਤਪਾਵਸ ਕਰਿਓ ਸੱਚ ਨਾਲ ਹੀ ਬੋਧਵਾਸ ਕਰਿਓ ਸੱਚ ਬਨਾ ਮਾਨਦੀ ਵਾਸਾ ਹੁਣ ਠੀਕ ਹੈ ਪਰ ਉਹ ਕਹਿੰਦੇ ਆ ਉਹ ਕਰਦਾ ਫਿਰ ਸਭ ਕੀ ਵੈਰਾ ਸਾਡੇ ਖਾਤਰ ਕੀ ਉਪਦੇਸ਼ ਹੈ ਇੱਕ ਹੈ ਹੋਵਾ ਤਪਾਵਸ ਕਾ ਨਾਨਕਦਰ ਸੱਚਾ ਧਰਮ ਦੇ ਵਿੱਚ ਤਪਾ ਬਸਾਵੇ ਧਰਮਤਾਲੇ ਜੀ ਬਸਾਵੇ ਜਦ ਸਿੱਟਾ ਤਾ ਮਨ ਬਸਾਵੇ ਲੋਕ ਕਾ ਜੇ ਪੂਰ ਨੂੰ ਤਰਪਾ ਹੋਏ ਪਰ ਇਹਨਾਂ ਦਾ ਰੱਬ ਬਸ ਕਰ ਗੁਰ ਬਸ ਕਰ ਰਹੀ ਸੀ ਇਹਨਾਂ ਨੂੰ ਇਹ ਇਹ ਰੱਬ ਨੂੰ ਬਸ ਕਰਨਾ ਚਾਹੁੰਦੇ ਆ ਮਨ ਨੂੰ ਨਹੀਂ ਬਸ ਕਰਨਾ ਚਾਹੁੰਦੇ ਇਹ ਨੂੰ ਬਸ ਕਰਦੇ ਮਨ ਨੂੰ ਨਹੀਂ ਬਸ ਕਰਦੇ ਠੀਕ ਹੈ ਜੀ ਆਪਣੇ ਫਿਰ ਅਰਥ ਕਰ ਦੋ ਜੀ ਇਸ ਲਾਈਨ ਦੇ ਆਪਾਂ ਦੁਬਾਰਾ ਕਰ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੇ ਕਹਾਈ ਆਪਾਂ ਬਸ ਮਾਨ ਬਾਸ ਕਾਡੋ ਕਰਨੀ ਕਰਕੇ ਹੋਊਗਾ ਜੇ ਕੜਨੀ ਤੇਰੀ ਠੀਕ ਹੈ ਗੁਰਮਤਨਸਰ ਕੜਨੀ ਹੈ ਫਿਰ ਮੋਲ ਬਾਸ ਆ ਜੇ ਜੋ ਗੁਰੂ ਨੇ ਕਿਹਾ ਗੁੰਦ ਲੈ ਤਾਂ ਫਿਰ ਮੋਲ ਬਾਸ ਆ ਜੀ ਉਹ ਗੱਲ ਨਾਲ ਵੀ ਤਾਂ ਕੋਈ ਵੜ ਫਰੇ ਵਾਲੀ ਗੱਲ ਹੀ ਨਹੀਂ ਹੈ ਆਪਾਂ ਨਹੀਂ ਇਹ ਲੋਭੀ ਹੈ ਜੇ ਲੋਭ ਛੱਡ ਲੂਗਾ ਤਬਾ ਬਚਾ ਜੂ ਜੇ ਲੋਭੀ ਬਣਿਆ ਰਹੂਗਾ ਲੋਭੀ ਦਾ ਫਸਾਦ ਹੋ ਜੂਗੇ ਇਹ ਅਸਲ ਤੋਂ ਆਪਣੀ ਹਿੱਦੂ ਮਤ ਬਚਾਉਣੀ ਸੀ ਗਰੀਬ ਦੇ ਬਹੁਤ ਔਖੀ ਬਚਾਈ ਹੈ ਹਿੱਦੂ ਮਤ ਨੇ ਹਿੱਦੂ ਮਤ ਕੀ ਬਚਾਈ ਕੀ ਹੈ ਹਿੱਦੂ ਮਤ ਹੀ ਬਣਾਤੀ ਸਿੱਖ ਮਤ ਦੀ ਹੋਰ ਮਤ ਹੀ ਮਤ ਬਣਨ ਵਾਸਤੇ ਬੜੇ ਕਾਪੜ ਵੇਲੇ ਦੂਦੇ ਹਾਂ ਤਾਂ ਕਾਪੜ ਲੱਗ ਗਿਆ ਨੇ ਜਿਹੜੇ ਕਾਪੜ ਵੇਲੇ ਨੇ ਇਨਾ ਨੇ ਆਦਾ ਜਾਣ ਕੇ ਦੀ ਸਮਝੇ ਸਮਝਣ ਦੀ ਨਹੀਂ ਹੈ ਤੇਰੀ ਦੀ ਇਹਨਾਂ ਦੀ ਜਾਂ ਫਿਰ ਇਹ ਵੀ ਜਾਣ ਉਧਰ ਦੇ ਰਲੇ ਹੋਏ ਸੀ ਠੀਕ ਹੈ ਜੀ ਇਹਦੀ ਵਿਆਖਿਆ ਆਪਾਂ ਫਰੀਲਪੁਰ ਵਾਲੇ ਚ ਵੀ ਪੜ ਲੈਂਦੇ ਆ ਹਾਂ ਦੇ ਅਰਥ ਹੈ ਜੀ ਕਰਨੀ ਉਪਰ ਤਪਾਵਸ ਨਿਯਾਉ ਹੁੰਦਾ ਹੈ ਜੇ ਕੋਈ ਕੁਝ ਔਰ ਕਹੇ ਕਹਾਵੇਗਾ ਤੋ ਨਹੀਂ ਮੰਨੇਗਾ ਅੱਛਾ ਇਹ ਨਹੀਂ ਦੱਸਦੇ ਵੀ ਕੌਣ ਨਹੀਂ ਮੰਨੇਗਾ ਇਸ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਤੋਂ ਹੀ ਇਹ ਗੱਲ ਅੱਗੇ ਲਿਖੀ ਹੈ 95% ਸਿਰਫ ਉਸ ਟੀਕੇ ਸਿੱਖ ਦੀ ਲੋਆ ਕੇ ਇਹਦੇ ਪ੍ਰਚਾਰਿਆ ਬਿਸ਼ਲੀ ਵਾਲਿਆਂ ਸਿੱਖ ਪਹਿਲਾਂ ਤੇ ਹੀ ਇਹਦੀ ਸਿੱਖੀ ਵਿਰੋਧੀ ਦੇ ਬਾਹੂ ਨੇ ਐਸਾ ਰੌੜਾ ਪਾਇਆ ਬੱਲੇ ਬੱਲੇ ਬੱਲੇ ਬੱਲੇ ਛਾਲ ਸਰ ਦੇ ਕਰਤੇ ਅੱਤ ਵਿਆ ਕਰਨ ਦੇ ਹੁਣ ਵਿਆ ਕਰਨ ਨੂੰ ਵੀ ਭੁੱਲ ਗਏ ਉਹਨੂੰ ਸਭ ਕੁਝ ਭੁੱਲ ਗਏ ਤੇ ਕੇਕ ਬੁਤੀ ਆਈ ਸੀ ਕਿ ਕੋਈ ਹਿਸਾਬ ਕਿਤਾਬ ਦੀ ਹੋ ਰਿਹਾ ਕਿਤੇ ਕੁਝ ਵੀ ਹੋ ਰਿਹਾ ਬਦਬੈੜਾ ਹੋ ਰਿਹਾ ਹੋ ਰਿਹਾ ਇਹੇ ਲੋੜ ਦੀ ਲੋੜ ਫੈਸਲਾ ਹੋਈ ਜਾਂਦਾ ਠੀਕ ਹੈ ਜੀ ਆਪਾਂ ਅਰਥ ਕੀਤੇ ਸੀ ਨਾ 10 18ਵੇਂ ਆ ਪਰੰਪਰੋ ਇਹ ਅਰਥ ਵੀ ਸਾਫ ਪਤਾ ਲੱਗਦਾ ਇਹ ਵਾਲੇ ਅਰਥ ਫਰੀਦਕੋਟ ਵਾਲਿਆਂ ਨੇ ਕੀਤੇ ਆ ਸਾਹਿਬ ਸਿੰਘ ਜੀ ਨੇ ਉਸ ਤਰ੍ਹਾਂ ਹੂ ਬਹੁ ਲਿਖਤੇ ਉਹ ਵੀ ਕਹਿੰਨੇ ਆ ਪਹਿਲੀ ਜਗ੍ਹਾ 18 ਦਾ ਉਹ ਅਰਥ ਕਰਦੇ ਆਂ 18 ਪੁਰਾਣ ਤੇ ਪ੍ਰੋਫੈਸਰ ਸਾਹਿਬ ਸਿੰਘ ਵੀ ਇਹਦਾ ਅਰਥ 18 ਪੁਰਾਣ ਕਰ ਦਿੰਨੇ ਆ ਸੀ ਸਾਰੰਗੀ ਵਾਰ ਜਿਹੜਾ ਪਹਿਲਾ ਪੌੜੀ ਦਾ ਸ਼ਲੋਕ ਸੀਗਾ ਨਿਸ ਦਿਨ ਉਚਰੇ ਭਾਰ 18 ਇਹਨਾਂ ਨੇ ਇਹੀ ਲਿਖਿਆ ਨਵ ਵਿਆਕਰਣ 6 ਸ਼ਾਸਤਰ ਖਟ ਅੰਗ ਵੇਦ ਕੇ ਅਰਥਾਤ ਜੋਤਸ ਠੀਕ ਹੈ ਜੀ पिंगल संख्या और एक अंग व्याकरण है कल्प इनका जो विचार करते हैं और रात्र दिन 18 पर्थों वाला भार महाभारत वहां 18 पुराणों सहित महाभारत को जो पढ़ते हैं तो ऐथे इसे शब्द दे अर्थ प्रोफेसर साहिब सिंह भी महाभारत ही कर दें ओदा मतलब भार जेड़े ਇੱਕ ਇੱਕ ਪੱਤਾ ਉਹਦੇ ਵਿੱਚ ਸਾਫ਼ ਲੱਗਿਆ ਹੋਇਆ 11 ਭਾਰ ਕੀ ਦੇ ਇੱਕ ਇੱਕ ਪੱਤਾ ਜੇ ਬ੍ਰਸਪਤੀ ਦਾ ਤੋੜੇ ਤਾਂ 11 ਭਾਰ ਹੋ ਜਾਂਦਾ ਹੈ ਦੀ ਗਣਤੀ ਕੀਤੀ ਹੋਈ ਹੈ ਆਪਾਂ ਨੂੰ ਇਸ ਗੱਲ ਸਾਫ਼ ਹੋ ਗਈ ਕਿ ਜਿਹੜੇ ਅਰਥ ਹੈ ਪਿੱਛੋਂ ਉਹ ਦੂਸਰੇ ਤੋਂ ਹੀ ਦੇਖ ਕੇ ਕੀਤੇ ਲੱਗਦੇ ਸਾਰੇ ਉਹ ਠੀਕ ਹੈ ਕੀਤਾ ਬਾਕੀ ਸਭ ਨੇ ਅਗਲ ਮਾਰੀ ਠੀਕ ਹੈ ਜੀ ਉਹਨਾਂ ਨੇ ਸ਼ਾਇਦ ਪਿੱਛੋਂ ਪੰਡਤਾਰਸੀ ਨਰੋਤਮ ਤੋਂ ਦੇਖਿਆ ਹੋਵੇਗਾ ਤੇ ਗੱਲ ਪਿੱਛੋਂ ਪੰਡਤਾਰਸੀ ਨਰੋਤਮ ਵਾਲੀ ਚੱਲਦੀ ਆ ਰਹੀ ਹੈ ਹਾਂ ठीक है जी पौड़ी गुरुमुखी चलत रचाए उन गुण प्रगटी आया गुरु वाणी सद् हर मन वसाया चलत रचाया गुरु की चलत रचाया अंदर सच प्रकट हो गया अंदर पैदा होया कुछ अंदर जन पदार्थ मिलेया क्या है अंदर गुण प्रगटी आया गुण प्रकट हो गए सारे ਸਾਰੇ ਗੁਣ ਪ੍ਰਗਟ ਹੋ ਗਏ ਰੋਮ ਆ ਗਿਆ ਰੋਮ ਨੇ ਰੜ ਸਾਰੇ ਗੁਣ ਪਰਖਾਉਂਦੇ ਉਹ ਹੀ ਗੁਣ ਗਾਇਨ ਕਰ ਰਿਹਾ ਜਿਹੜੇ ਗੁਣ ਪ੍ਰਗਟ ਕਰ ਰਿਹਾ ਜਿਹੜੇ ਪ੍ਰਗਟ ਹੋ ਰਹੇ ਨੇ ਸਮਝ ਆ ਗਈ ਪ੍ਰਗਟ ਕੀ ਹੋ ਗਏ ਗੁਰਾਂ ਦੀ ਸਮਝ ਆ ਗਈ ਗੁਣ ਦਾ ਕਰਤਾ ਠੀਕ ਹੈ ਜੀ ਗੁਰਬਾਣੀ ਸਾਧ ਉਚਰ ਹਰ ਮਨ ਵਸਾਇਆ ਗੁਰਬਾਣੀ ਦੇ ਵਿੱਚ ਗੁਣ ਤਾਂ ਇਹ ਹੀ ਉਚਰਦੇ ਨੇ ਗੁਣੇ ਪ੍ਰਗਟ ਕਰ ਲੈਦੇ ਹੋਗੇ ਬੋਧ ਦੇ ਵਿੱਚ ਹਰ ਬੋਧ ਦੇ ਵਿੱਚ ਵਸਿਆ ਹੋਇਆ ਕੋਲ ਟਿਕਿਆ ਹੋਇਆ ਹਰ ਵਿੱਚ ਵਸਿਆ ਹੋਇਆ ਹੋਜੀ ਸ਼ਕਤ ਗਈ ਭ੍ਰਮ ਕਟਿਆ ਸ਼ਿਵ ਜੋਤ ਜਗਾਇਆ ਜਿਨ ਕਾ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ ਸ਼ਕਤ ਗਈ ਸ਼ਕਤੀ ਗੜੀ ਚਲੀ ਗਈ ਉਹ ਕਲਪਣ ਦੀ ਜਿਹੜੀ ਸ਼ਕਤੀ ਸੀ ਨਾ ਜਿਹੜੀ ਆਪਣੀ ਸ਼ਕਤੀ ਸੀ ਪ੍ਰਕਟਿਆ ਆਪਣੀ ਸ਼ਕਤੀ ਦਾ ਪਰਮ ਸੀ ਆਪਣੇ ਓਕਾਰ ਦਾ ਪਰਮ ਸੀ ਆਪਣੀ ਅਕਲ ਦਾ ਪਰਮ ਸੀ ਉਹ ਕਟਿਆ ਗਿਆ ਸ਼ਿਵ ਜੋਤ ਜਗਾਇਆ ਜੋਤ ਸਰੂਪ ਛਲ ਜਾਗ ਤੇ ਕੋ ਜਾਗ ਕੋ ਜਾਗਤਾ ਮਿਲੇ ਚਾਰਨ ਨੂੰ ਜਾਗਿਆ ਤਾਂ ਪਹਿਲੇ ਹੀ ਜਾਗਦਾ ਸੀ ਜਾਗ ਕੋ ਜਾਗਤਾ ਮਿਲੇ ਦੋ ਇੱਕ ਹੋ ਗਏ ਇਹ ਸ਼ਿਵ ਜੋਤ ਮਨ ਹੈ ਜੀ ਇੱਥੇ ਸ਼ਿਵ ਜੋਤ ਜਗਾਇਆ ਸ਼ਿਵ ਜੋਤ ਜਗਾਇਆ ਬੰਦੂ ਜਗਾਇਆ ਸ਼ਿਵ ਨੇ ਸ਼ਿਵ ਸੀਗਾ ਜਿਹੜਾ ਕਾ ਲਹਿ ਰਿਹਾ ਸੀ ਠੀਕ ਹੈ ਜੀ ਇਹ ਬਹਾਦੇਵ ਸੀਗਾ ਜਿਹੜਾ ਕੁੱਤਾ ਪਿਆ ਸੀ ਬਹਾਦੇਵ ਜਾਗੇ ਹੁਣ ਬਹਾਦੇਵ ਕੋ ਕਹਤ ਸਦਾ ਜੇ ਸਦਾ ਛਪਤਾ ਦਰਾਲਾ ਸੀ ਛਤਗੁਰ ਸੀ ਛਪਤਾ ਜੋਤ ਸੀ ਜੋਤ ਰੂਪ ਜੀਣਾ ਮਤ ਜਗਾਤਾ ਠੀਕ ਹੈ ਜੀ ਪਰ Shiv ਦੇ ਹੱਥ ਆਪਾਂ ਕਰੇ ਪਰਮੇਸ਼ਰ ਵੀ ਕਰਦੇ ਆ ਕਿ ਨਹੀਂ ਕਿਰੇ Shiv ਸ਼ਕਤੀ ਆਪ ਪਾਈ ਕੇ ਉੱਥੇ ਕੀ ਕਰਾਂਗੇ Shiv ਰੂਪ ਸ਼ਕਤੀ ਆਪੋ ਪਾਈ ਹੈ ਕਰਤਾ ਆਪੇ ਉਹ ਬਰਤਾਏ ਕੋਈ ਹੋ ਜਾਂਦਾ ਹੈ ਕਿ ਚਾਰ ਪਦਾਰਥ ਬਿਲਗੇ ਦੇਖਾਂ ਫਿਰ ਇਹ ਕਹਿੰਦੇ ਕੋਈ ਹੋ ਜਾਂਦਾ ਗੁਰਪਰਮੇਸ਼ਰ ਕੋ ਜਾਣ ਅਗਿਆਨੇ ਵੀ ਗੁਰਪਰਮੇਸ਼ਰ ਕੋਈ ਹੋ ਜਾਂਦਾ ਚਾਹੇ ਬੋਲਣ ਲੱਗਿਆ ਬੋਲਣ ਲੱਗਿਆ ਤਾਂ ਪਰਮੇਸ਼ਰ ਵੀ ਪਰਮੇਸ਼ਰ ਹੈ ਚਾਹੇ ਬਲਾਇਆ ਹੀ ਬੋਲਦਾ ਹੈ ਬੋਲਦਾ ਹੈ ਕਿ ਹੈ ਗਲਤਾ ਪਰਮੇਸ਼ਰ ਦੀ ਉਹ ਕਰਦਾ ਠੀਕ ਹੈ ਜੀ ਪਰ ਇੱਥੇ ਜਿੱਥੇ ਕਿਹਾ ਜਿਸ ਦੇਖਾਂ ਤੈਂ ਰੱਬ ਰਹੇ ਸ਼ਿਵ ਸ਼ਕਤੀ ਦਾ ਮੇਲ ਇੱਥੇ ਸ਼ਿਵ ਸਤਗੁਰ ਹੈ ਜੀ ਹਾਂ ਸ਼ਿਵ ਸਤਗੁਰ ਸ਼ਕਤੀ ਕੀ ਹੈ ਮਨ ਵਾਸਤੇ ਕੀ ਸ਼ਕਤੀ ਇੱਛਾ ਸ਼ਕਤੀ ਨਹੀਂ ਇਹ ਮਨ ਸ਼ਕਤੀ ਵੀ ਕਿਹਾ ਨਾ ਫਿਰ ਮੰਨੇ ਹੋਊਗਾ ਹਾਂ ਉਹ ਵੀ ਸ਼ਕਤੀ ਹੈ ਇੱਛਾ ਬੁੱਧ ਦੇ ਵਿੱਚ ਹੈ ਇੱਛਾ ਸ਼ਕਤੀ ਹੈ ਇਹਨਾਂ ਨੂੰ ਫਿਰ ਕੋਈ ਬੰਦੂ ਸ਼ਕਤੀ ਕਹਿੰਦਾ ਪਰ ਇੱਛਾ ਸ਼ਕਤੀ ਹੈ ਅੱਛਾ ਜੀ ਠੀਕ ਹੈ ਸ਼ਿਵ ਜਿਹੜਾ ਸਤਗੁਰ ਸਰੂਪ ਹੈ ਉਹਨੇ ਮਨ ਜਿਹੜਾ ਜੋ ਸਰੂਪ ਹੈ ਉਹਨੂੰ ਜਗਾਤਾ ਹੈ ਜੀ ਹਾਂ ਇੱਛਾ ਸ਼ਕਤੀ ਜਾਗਿਆ ਜੀ ਇੱਛਾ ਤਾਂ ਪਹਿਲਾਂ ਸੀ ਉਹਦੇ ਚ ਨਾ ਨਾ ਨਾ ਪਹਿਲਾਂ ਜਗ ਤੇ ਪਹਿਲਾਂ ਬੰਦੂ ਆਪਣੇ ਕਾਲਿਆਂ ਨੂੰ ਦੀਓਛਾ ਸੀ ਹੁਣ ਜਾਣੀ ਐ ਇਸ਼ਾਸ਼ ਦੋ ਬੋਲਣ ਦੀ ਅੱਛਾ ਹੁਣ ਚਿੱਤ ਦੀ ਇੱਛਾ ਸ਼ਕਤੀ ਜਾਗੀ ਹੈ ਚਿੱਤ ਦੀ ਇੱਛਾ ਸ਼ਕਤੀ ਜਾਗੀ ਹੈ ਅੱਛਾ ਪੂਰਨ ਹੋਇ ਚਿੱਤ ਦੀ ਇੱਛਾ ਬਿਲਕੁਲ ਬਿਲਕੁਲ ਬਿਲਕੁਲ ਹੁਣ ਪੂਰਨ ਚਿੱਤ ਦੀ ਇੱਛਾ ਹੁਣ ਪੂਰਨ ਠੀਕ ਹੈ ਜਿਨ ਕੈ ਪੋਤਾ ਪੁੰਨ ਹੈ ਗੁਰਪੁਰਖ ਮਿਲਾਇਆ ਜਿਨ ਕੈ ਪੋਤਾ ਪੁੰਨ ਈਸਾ ਦੇ ਗਿਆਨ ਦਾ ਪੋਤਾ ਚੜ ਗਿਆ ਉਹੀ ਪੁੰਨ ਮੱਚਾ ਪੋਤਾ ਪਾ ਮਨ ਨੂੰ ਵੀ ਤਾਂ ਕਹਿੰਦੇ ਨਾ ਸਹੀ ਪੋਤਾ ਫੇਸਬੁਕ ਤੇ ਤੇ ਉਹ ਦਾਦੇ ਜੇਵਰ ਪੋਤਾ ਪ੍ਰਵਾਨ ਪੋਤਾ ਪ੍ਰਵਾਨ ਉਹ ਤੇ ਪੋਤਾ ਪਰਵਾਨ ਆ ਜਿੰਨ ਕੈ ਪੋਤੇ ਬਹੁਤ ਚੱਲ ਅੱਛਾ ਜਿੰਨ ਪੋਤਾ ਪੁੰਨ ਹੈ ਠੀਕ ਤੇ ਹੋ ਰਿਹਾ ਪੋਤਾ ਅੱਛਾ ਇਹ ਗਿਆਨ ਦਾ ਪੋਤਾ ਹੈ ਜੀ ਰਾਜਾ ਗਿਆਨ ਦਾ ਪੋਤਾ ਠੀਕ ਹੈ ਗੁਰਪੁਰਖ ਮਿਲਾਇਆ ਜਿਹੜਾ ਗੁਰਪੁਰਖ ਹੈ ਜਿਹੜਾ ਉਹਦੇ ਪੋਤਾ ਫੇਰਨਾ ਉਹਦੇ ਨਾਲ ਜਿੱਟਾ ਹੀ ਹੁਣ ਉਹਦੇ ਕਾਲਾ ਦੀ ਹੁੜੂ ਨੇ ਪਰਮ ਦੀ ਪੈਦਾ ਕਰਦੋ ਉਹਦੇ ਗਿਆਨ ਪੈਦਾ ਕਰਦੋ ਠੀਕ ਹੈ ਜੀ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਸੁਣ ਕਹਿੰਦਾ ਜਿਹੜੇ ਜਾਗਦੇ ਨੇ ਜਿਹੜੇ ਟਿਕੇ ਨੇ ਨੇ ਸਹਜੇ ਰਹਦੇ ਆਂ ਲੋਭ ਸੁਭਾਇ ਆਂ ਨਾਮ ਨੇ ਵੀ ਸਮਾਇਆ ਲੈਣ ਜਿਹੜੇ ਸਹਜ ਆ ਜਾਂਦੇ ਨੇ ਜਾਗ ਪੈਦੇ ਨੇ ਜਾਗ ਤੇ ਨੂੰ ਜਾਗਦਾ ਬਿੜਿਆ ਲੈਂਦਾ ਹਰ ਇੱਕ ਦੂਰੇ ਨੂੰ ਸਮਾਇ ਰਹਿਣ ਦੇ ਜੁੜੇ ਰਹਿੰਦੇ ਸੋ ਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਸਮਾਪਤੀ ਹੈ ਜੀ